सतप्रदी साजि नवाजी साज संगत अपनी रचना पित्तर करो गज्ज के आखो तान सतगुरु राम सिंह जी अपने सतगुरु दा जस करन वास्ते आपा इकट्ठे होए हां सतसंगी हो ਮੈਂ ਰਾਤੀ ਵੀ ਅਰਜ਼ ਕੀਤੀ ਸੀ ਕਿ ਦੁਨੀਆਂ ਉੱਤੇ بڑے بڑے ਪਕੰਬਰ ਬੜੀਆਂ-ਬੜੀਆਂ ਕਰਾਮਾਤਾਂ ਵਾਲੇ ਆਏ ਪਰ ਸਾਧਗੁਣਾ ਅੱਗੇ ਕਿਸੇ ਦੀ ਪੇਸ਼ ਨਾ ਗਈ ਜਿਹੜੇ ਮੁਸਲਮਾਨ ਗੁਰੂ ਨਾਨਕ ਨੂੰ ਆਪਣੇ ਮੱਜ ਵਿੱਚ ਲਿਆਉਣਾ ਚਾਹੁੰਦੇ ਸੀ ਕਿ ਸਾਡੇ ਮੁਹੰਮਦ ਸਾਹਿਬ ਨੂੰ ਮੰਨੇ ਤੇ ਸਾਡਾ ਮਜਬੂਤਾ ਹੋ ਜਾਏ ਤਾਂ ਸਾਧਗੁਣਾ ਨੇ ਫਿਰ ਬੜੀਆਂ ਦੂਰ-ਦੂਰ ਦੀਆਂ ਦਲੀਲਾਂ ਦੇ ਕੇ ਇਹ ਸਮਝਾ ਦਿੱਤਾ ਕਿ ਜਿਹੜੀ ਅਸਲ ਮੁਕਤੀ ਆ ਉਹ ਮੁਹੰਮਦ ਸਾਹਿਬ ਦੇ ਵੀ ਇਖਤਿਆਰ ਨਹੀਂ ਉਹਦੀ ਆਪਣੀ ਮੁਕਤੀ ਨਹੀਂ ਉਹ ਤੁਹਾਡੀ ਕਿੱਥੋਂ ਕਰ ਦੋ ਸੋ ਇਸ ਕਰਕੇ 사ਦਗੁਰ ਦਾ ਪ੍ਰਤਾਪ ਇਡਾ ਵੱਡਾ ਹੈ ਜਿਹੜੇ ਲੋਕਾਂ ਦੇ ਮੁਸਲਮਾਨਾਂ ਦੇ ਜਾਂ ਹੋਰ ਪੀਰ ਪਖੀਰ ਜਿਨ੍ਹਾਂ ਨੂੰ ਲੋਕੀ ਰੱਬ ਮੰਨੀ ਬੈਠੇ ਸੀ ਨਾ ਉਹ ਵੀ 사ਦਗੁਰ ਦੇ ਚਰਨਾਂ ਤੇ ਆ ਕੇ ਚੁਕੇ ਕਿਉਂਕਿ 사ਦਗੁਰ ਦਾ ਪ੍ਰਤਾਪ ਵੱਡਾ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕੋ ਕਰਬਖੀਲੀ ਈਰਖਾ ਦੁਆਇਸ਼ ਕਰੇ ਕਿ ਮੈਂ ਵੱਡਾ ਆਪਣੀਆਂ ਕਰਾਮਾਤਾਂ ਵਿਖਾਵੇ ਪਰ ਉੱਥੇ ਨਹੀਂ ਕਿਸੇ ਦੀ ਪੇਸ਼ ਜਾਂਦੀ ਕੋਈ ਕਰਬਖੀਲੀ ਨਵੇ ਨਹੀਂ ਫਿਰ 사ਦਗੁਰੇ ਆਣ ਨੂੰ ਆਇਆ ਅੱਜ ਵੀ ਕਥਾ ਵੇ ਸਤਿਗੁਰੂ ਪ੍ਰਤਾਪ ਸਿੰਘ ਦੇ ਪਾਠਣ ਵਿੱਚ ਆਇਆ ਸੀ ਕਿ ਜੇ ਅਸੀਂ ਕੂਕੇ ਹੀ ਆਖੀਏ ਵੇ ਸਾਡਾ ਹੀ ਆ ਤੇ ਇਹ ਗੱਲ ਨਹੀਂ ਨਾ ਉਹ ਚਿੱਟੀ ਦਾ ਨਾ ਉਹ ਕਾਲੀ ਦਾ ਨਾ ਉਹ ਕਿਸੇ ਪੇਖਦਾ ਉਹ ਸਾਰੀ ਸ੍ਰਿਸ਼ਟੀ ਦਾ ਪਤਾ ਨਹੀਂ ਹੁਣ ਕਿਦੇ ਤੇ ਕਿਰਪਾ ਕਰ ਦੇਣੀ ਆ ਕਿਉਂਕਿ ਥੋ ਗੁਰੂ ਜਿਹੜਾ ਥੋੜੇ ਜੇ ਰਜਵਾੜੇ ਵਿੱਚ ਨਹੀਂ ਵੜਿਆ ਹੋਇਆ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਬਣ ਕੇ ਆਉਂਦਾ ਉਹਨੂੰ ਮੰਨੇ ਕੋਈ ਨਾ ਮੰਨੇ ਗੁਰੂ ਨਾਨਕ ਨੂੰ ਕਿਹੜਿਆ ਲੋਕਾਂ ਸਾਰਿਆਂ ਮੰਨਿਆ ਵੇ ਢੇਮਾ ਹੀ ਕਈ ਸਾਈਂ ਮਾਰਦੇ ਰਹੇ ਆ ਇੱਕ ਨਾਨਕ ਨੂੰ ਉਹਨੂੰ ਪੂਤਣਾ ਹੀ ਆ ਛੱਡਿਆ ਕਿ ਬੰਦਾ ਹੀ ਨਹੀਂ ਹੈ ਹੀ ਪੂਤਣਾ ਜਦੋਂ ਦੀ ਧਰਤੀ ਬਣੀ ਆ ਕਿਸੇ ਗੁਰੂ ਨੂੰ ਵੀ ਸਾਰੀ ਦੁਨੀਆ ਨਹੀਂ ਜੇ ਮੰਨਿਆ ਭਾਗਾ ਵਾਲੇ ਮੰਨਦੇ ਆ ਜਿਨ੍ਹਾਂ ਦੇ ਕਰਮ ਆੜੇ ਆ ਨਾ ਉਹ ਨਹੀਂ ਗੁਰੂ ਨੂੰ ਗੁਰੂ ਜਾਣਦੇ ਤੋ ਜਾਣੇ ਬਗਾਇਰੇ ਨੂੰ ਉਹ ਕਹਿੰਦੇ ਆ ਸਤਗੁਰੂ ਨੂੰ ਸਾਹ ਵੇਖਦਾ ਜੇ ਜਗਤ ਸੰਸਾਰ ਵੇਖ ਤਾ ਕਿ ਸਾਰੀ ਦੁਨੀਆ ਹੀ ਰਹੀ ਪਰ ਡਿੱਠੇ ਮੁਕਤਨਾ ਹੋ ਵੀ ਜੇ ਚਰਬਦ ਨਾ ਕਰੇ ਪਿਆ ਜਿੰਨਾ ਚਿਰ ਪ੍ਰੇਮ ਭਾਵਨਾ ਅੰਦਰ ਨਹੀਂ ਭਾਵਨਾ ਨਹੀਂ ਕਿ ਮੇਰਾ ਗੁਰੂ ਜਿਹੜਾ ਸਮਰਾਥ ਆ ਜੋ ਕੁਝ ਮਰਜੀ ਆ ਕਰ ਸਕਦਾ ਉਹਨਾਂ ਚਿਹਰੇ ਦਾ ਸੋਰ ਦਾ ਵੇਖਿਆ ਨਹੀਂ ਰਹੀ ਗਤੀ ਵੀ ਨਹੀਂ ਹੁੰਦੀ ਇਸ ਕਰਕੇ ਸਜਣੋ ਸਤਗੁਰ ਆਮ ਸਿੰਘ ਸੱਚੇ ਪਾਤਸ਼ਾਹ ਨੇ ਪ੍ਰਕਾਸ਼ ਕੀਤਾ ਜਿਤਨਾ ਗਿਆਨੀ ਗਿਆਨ ਸਿੰਘ ਲਿਖਿਆ ਕਿ ਗੁਰੂ ਦਸਮੇਸ਼ ਜੀ ਦੇ ਪਿੱਛੋਂ ਜਦੋਂ ਖਾਸੇ ਨੇ ਛੱਡ ਦਿੱਤਾ ਰਾਹ ਤੇ ਕਹਾਂ ਆਣ ਮੱਲਿਆ ਬੁਰਛਾ ਨੇ ਲੋਟ ਦੇਸ਼ ਵਿੱਚ ਖੂਬ ਕੀਤੀ ਨਰਮਲਾ ਨਰੋਸਿਆਂ ਗਰੀਬਾਂ ਨੂੰ ਦਬਲਿਆ ਹੱਤ ਦਾ ਤੇ ਰੱਬ ਦਾ ਵੈਰ ਮਸਹੂਰ ਤਰੋਂ ਵੈਗਰੂ ਨੇ ਉਹਨਾਂ ਦਾ ਵੀ ਤਖਤਾਂ ਉਥੱਲਿਆ ਫੇਰ ਕਾਲ ਵਿੱਚ ਸਤਜੁਗ ਲਾਣ ਲਈ ਉਸੇ ਨਿਝ ਜੋਤ ਰੂਪ RAM ਸਿੰਘ ਕੱਲੇ ਸੋ ਸਾਡੇ ਵਾਸਤੇ ਤੇ ਸਤਿਗੁਰੂ RAM ਸਿੰਘ ਜੀ ਸਾਹਿਬ ਦੱਸੋ ਪਾਛਾ ਸਤਿਗੁਰੂ ਨਾਨਕ ਜੀ ਦੇ ਉਹਦੇ ਅਵਤਾਰ ਗ੍ਰੰਥਾਂ ਦੇ ਲਿਹਾਜ ਨਾਲ ਅੱਗੋਂ ਪਈ ਜਿਨ੍ਹਾਂ ਨੂੰ ਨਹੀਂ ਪਰਮੇਸ਼ਰ ਨੇ ਅੱਖਾਂ ਦਿੱਤੀਆਂ ਸਾਰਿਆਂ ਨੂੰ ਗੁਰੂ ਵਾਲੀਆਂ ਅੱਖਾਂ ਵੀ ਨਹੀਂ ਮਿਲੀਆਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਈ ਜਿਨ੍ਹਾਂ ਦੀਆਂ ਅੱਖਾਂ ਨਾ ਨਾ ਹੋਣ ਲੋਕੀ ਕਹਿੰਦੇ ਨੇ ਉਹਨੇ ਨੇ ਕਈ ਅੱਖਾਂ ਵਾਲੇ ਹੀ ਜੰਨੇ ਨੇ ਅਨੇ ਇਹ ਨਾ ਅਖੀਆਂ ਜਿਸ ਮੁਖ ਲੋਏ ਨਾ ਆਏ ਨੇ ਕਈਏ ਨਾਨਕਾ ਖਸਮੋ ਕੁੱਥੇ ਜਾ ਤੋ ਇਸ ਕਰਕੇ ਸਜਣੋ ਸਤਗੁਰ ਆਮ ਸਿੰਘ ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਨ ਵਾਸਤੇ ਦੇਸ਼ਾਂ ਪ੍ਰਦੇਸ਼ਾਂ ਦਾ ਭਲਾ ਕਰਨ ਵਾਸਤੇ ਇਹ ਰਚਨਾ ਰਚੀ ਲੱਖਾਂ ਹਜ਼ਾਰਾਂ ਦਾ ਭਲਾ ਕੀਤਾ ਤੇ ਇਹੋ ਜਿਹਾ ਸਮਾਂ ਬਣ ਗਿਆ ਕਿ ਜਦੋਂ ਕਿਉਂਕਿ 사드ਗੁਰੂ ਨੇ ਇੱਕ ਥਾਂ ਤੇ ਨਹੀਂ ਫਿਰਨਾ ਹੁੰਦਾ ਉਹ ਸਾਰੀ ਸ੍ਰਿਤੀ ਦਾ ਮਾਲਕ ਹੈ ਕਿਸੇ ਸਮੇਂ ਬ੍ਰਹਮਾ ਦਾ ਪੁੱਤਰ ਸਰਾਫਿਆ ਸੀ ਜਿਨ੍ਹਾਂ ਨੂੰ ਸਮੁੰਦਰਾਂ ਤੋਂ ਪਾਰ ਤਾਰਨ ਜਾਂ ਤਾਰਨ ਵਾਸਤੇ ਜਾਣਾ ਸੀ ਤੋ 사드ਗੁਰੂ ਨੇ ਰਚਨਾ ਰਚੀ ਐਸ ਪੈਣੀ ਸਾਹ ਵਿੱਚ ਬੜਾ ਦੁਵਾਨ ਲੱਗਾ ਹੋਇਆ ਹੈ ਤੇ ਪਰਦੇਸ ਜਾਣ ਦੇ ਸਮੇਂ ਪਲੀ ਚੜ ਕੇ ਆ ਗਈ ਤੇ ਐਉਂ ਕਰਕੇ ਭਰੇ ਦੁਵਾਨ ਦੇ ਵਿੱਚ 사드ਗੁਰੂ ਰਾਜ ਸਿੰਘ ਨੂੰ ਇਹ ਆਵਾਜ਼ ਦਿੱਤਾ ਹੋਇਆ Oh, my God.